ਨਿਰਭਉ ਉਹ ਬਹੁ ਭੈ ਤੋਂ ਰਹਿਤ ਹੈ ਉਹ ਸਨੇ ਇੱਕ ਨਿਰਭਉ ਗਿਆਨ ਹੈ ਤੇ ਨਹੀਂ ਵਿਸ਼ੇਸ਼ ਕਰਕੇ ਸਾਰੇ ਜੀਵਾਂ ਦੇ ਤਾਂ ਹੀ ਆਪ ਨੂੰ ਭੈ ਦੇਣ ਵਾਲਾ ਹੈ ਅਗੇ ਨਿਰਭਉ ਜਿਹੜੇ ਪੁਰਖ ਆਉਣ ਆਦੇ ਕੋ ਦੁਨਿਆ ਦੇ ਨਿਰਭਉ ਆਪਣੇ ਆਪ ਨੂੰ ਭਾਉਣ ਆਗਿਆ ਉਹਨੂੰ ਮਿਲਿਆ ਹੀ ਭੈ ਦੇ ਕਰਕੇ ਉਹਨਾਂ ਦਾ ਭੈ ਦਰਵਾ ਨਾਸ਼ ਕਰਵਾ ਹੈ ਅਤੇ ਨਿਰਭਉ ਭਉ ਤੋਂ ਰਹਤ ਹੈ ਜੂਨ ਤੋਂ ਤੇ ਭਵਨੋਂ ਕਲਿਆਣ ਦਾ ਨਿਰ વિશેਸ਼ ਕਰਕੇ ਉਹ ਕਲਿਆਣ ਸ੍ਰੂਪ ਹੈ ਨਿਰਵੈਰੋ ਦੇ ਮੈਰ ਤੋਂ ਰਹਤ ਹੋਦਾ ਕਿਸੇ ਨਾਲ ਵੈਰ ਨਹੀਂ ਸਾਰਿਆਂ ਦਾ ਆਕਮਾ ਹੋਣ ਕਰਕੇ ਤੇ ਤੋਂ ਰਹਤ ਹੈ ਵੈਰ ਹੋਵੇ ਜੀ ਕੋਈ ਜਾਂ ਦਾ ਧੀਵਨਾ ਸੁਖੇ ਦਾ ਛਰਾ ਦਾ ਕੋਈ ਵੈਰ ਨਹੀਂ ਪਿਛੇ ਵਿਚਾਰਾਂ ਦਾ ਕੋਈ ਵੈਰ ਨਹੀਂ ਮੋ ਕਾਵੰਨ ਨਕ੍ਰੋਧੰਨ ਲੋਭੰਨ ਲੋਭ ਇਹ ਸਾਰਿਆਂ ਬੈਲਾ ਤੋਂ ਰਹਿੰਦਾ ਉਹ ਵੈਰ ਕਾਰ ਦਾ ਤੋਂ ਰਹਿੰਦਾ ਨਿਰਵੈਰ ਜਿਹੜੇ ਭਗਤਾਂ ਜਿਵੇਂ ਨਾਲ ਵੈਰ ਕਰਨ ਵਾਲੇ ਹਰਨਾਕ ਸ਼ਾ ਵਿੱਚ ਹੈ ਉਹਨਾਂ ਨੂੰ ਮਰਛੇ ਦਾ ਧਾਰ ਕਰਕੇ ਨਿਗੁਣ ਕਰਨੋਂ ਆਪਕੋ ਮੇ ਵੈਰ ਭਾਵਨਾ ਵਿੱਚੋਂ ਆਪਕੋ ਐਸਾ ਨਿਰਵੈਰ ਸੀਤਾ ਹੈ काल में कल्पना का कल्पना तो रहत है काल में समय का है पूरी एक ही वर्तमान काल समय तो रहत है अजे काल, है। काल कलंका में कार्य अभियान ਕਹਿੰਦੇ ਰਹੇ ਕੋਈ ਬੋਦੀਆ ਫੀਰੀਏ ਆਪੋ ਸਾਰੇ ਕਾਲ ਵਿੱਚ ਪੈਦਾ ਹੋਏ ਸਮੇਂ 'ਚ ਉਹ ਇੱਕ ਸਮੇਂ ਦੇ ਕਾਲ ਨਹੀਂ ਕੋਪੋ ਖਾਲਿਕ ਹੁਕਮ ਪਠਾਇਆ ਜੀ ਜਦੋਂ ਪਾਇਤ ਸਮਾਇਆ ਕਿ ਤਮਾਸ਼ੀ ਇਨਕਾਰ ਮਾਰਨ ਕਹਿ ਗਏ ਸਿੱਟ ਜਿਵੇਂ ਖਾਲਿਕ ਜੀਨ ਨੂੰ ਪੈਦਾ ਕਰਦੇ ਤੇ ਲੈ ਕਰੀ ਜਾਂਦਾ ਹੈ ਉਹਦਾ ਇੱਕ ਤਮਾਸ਼ੀ ਜਿਵੇਂ ਸਭਾ ਦੇ ਕਿਹਾ ਨਾ ਦਰਚਾਉਂਦਾ ਉਹ ਇੱਕ ਕਾਲ ਰੱਖਿਆ ਹੋਇਆ ਆਪ ਸੰਦਰੇ ਦਾ ਗਾਉਂਦੇ ਰਹੇ ਤਹਰ ਨੂਰ ਹੈ ਤੇ ਮੇਰੀ ਉਸ ਵਿੱਚ ਗ੍ਰੀਤੀ ਹੈ ਐਸਾ ਮੂਤ ਜੀਂ ਤੇ ਅਜੂਨੀ ਅਜਨਵਾ ਰੂਪ ਹੈ ਦੁਨਾਂ ਵਿੱਚ ਨਹੀਂ ਆਉਂਦਾ ਮਾਤਾ ਦੇ ਘਰ ਵਿੱਚ ਨਹੀਂ ਆਉਂਦਾ ਹੈ ਸੋ ਮੁਖ ਜਲੋ ਕਹੇ ਸਾਗਰ ਜੋਨੀ ਜਿਹੜੇ ਪਰਮੇਸ਼ਰ ਨੂੰ ਦੁਨਾਂ ਜਾਇਆ ਜਾਂਦਾ ਉਹ ਮੂਖ ਫੜ ਜਾਵੇ ਹਾ ਜੀਆ ਉਹ ਜਨਵਾ ਰੂਪਾ ਪਰਮੇਸ਼ਰ ਦੁਨਾਂ ਜਾਣ ਵਾਲਾ ਵੀ ਦੇ ਆਦਿ ਬ੍ਰਹਮਾ ਆਦ ਕੋਈ ਉਹ ਤੋਂ ਪੂਰੇ ਐ ਪੂਰੇ ਨਹੀਂ ਉਹਦੇ ਬਰਾਬਰ ਨਹੀਂ ਹੋ ਸਕਦੇ ਬ੍ਰਹਮਾ ਆਦ ਜਿਹੜੇ ਰਹਾ ਕਾਲੀ ਪਾਤ ਉਹ ਬ੍ਰਹਮਾ ਦਾ ਕਾਲੀ ਪਾਤ ਸਦਾ ਸਿਂਚੂ ਸਭ ਦੇਸ਼-ਵਿਦੇਸ਼ ਹੋ ਉਹ ਕਹਿ ਹੈ ਤੇ ਜੁਨੀ ਮਾਹ ਮਾਇਆ ਦੇ ਕਾਰਨੂ ਮਾਇਆ ਹੈ ਮਾਇਆ ਤੋਂ ਵੀ ਉਹ ਰਹਿਤ ਹੈ ਤੋਂ ਸ਼ੁਰੂ ਕਰੇ ਜੁਨਾ ਜਗਤੋਂ ਵੀ ਹੈ ਤੈ ਉਹ ਅਬੇ ਅਨੂਨੀ ਅਯਨਮੀ ਜਿਹੜੀ ਮਾਇਆ ਕਹੋਦੀ ਹੈ ਇਹ ਤੇ ਉਹ ਸਾਰਿਆਂ ਰੂਪ ਹੈ ਐਸਾ ਉਸ ਚੰਦ ਸੂਰਜ ਆਦਿ ਨੇ ਦੇਖਨ ਚੂਤੀ ਮੰਨੇ ਹੋਏ ਵਰਦੀਪੀ ਮੰਨੇ ਹੈ ਚੰਦ ਗੁਰੂਜੇ ਤਾਰੇ ਅਗਨੀ ਇਹੀ ਯਾਦ ਕੋ ਜੇਸੂ ਦੇ ਪ੍ਰਕਾਰ ਬੁੱਧੀ ਨਿਆਂ ਤੋਂ ਬੁੱਧੀ ਨੂੰ ਮੰਨਿਆ ਹੈ। ਅਬੇ ਚੰਨੀ ਗੁੰਮਾ ਤੋਂ ਆ ਰਹੇ ਬਾਣੀ ਦੇ ਤਾਂ ਮੰਨਿਆ ਹੈ। ਅਬੇ ਇਸੇ ਪ੍ਰਕਾਰ ਗੋਬੇ ਵਾਲਿਆਂ ਸਾਹਿਬ ਨੇ ਟਿੱਡਿਆ ਨੂੰ ਇੱਕ ਜੋਤੀ ਮੰਨਿਆ ਵੀ ਇਹ ਵਿੱਚੇ ਖੰਭਾਂ ਦੀ ਪ੍ਰਕਾਸ਼ ਹੁੰਦਾ ਹੈ। ਇਹ ਖੁਦ ਜੋਤੀਆਂ ਦਾ ਸੈਕੜਿਆਂ ਦਾ ਤਕਨ ਪ੍ਰਕਾਸ਼ਣ ਵਾਲਾ ਹੈ ਉਹ। ਅਬੇ ਸਾਇਬ ਪ੍ਰਕਾਸ਼ ਸਰੂਪ ਹੋਏ ਹੋ। ਸਹਿ ਜਿਹਨਿਆ ਨੂੰ ਭਗਣ ਵਾਲਾ ਹੈ ਲੈ ਕਰਨ ਵਾਲਾ ਹੈ ਸਹਿ ਹੈ ਉਹ ਬਗਤ ਪ੍ਰਕਾਸ਼ ਰੂਪ ਉਹ ਅਦੇ ਸਾਰੇ ਜੀਵ ਸੈਨੋ ਹੈ ਦਾ ਰੂਪ ਹੈ ਉਹ ਸਹਿ ਸੈਗਰੇ ਜਿਨੀ ਸਾਰੀ ਸ੍ਰਿਤੀ ਰਚਨਾ ਹੈ ਇੰਦ੍ਰੇ ਕ੍ਰਾਣ ਇਹ ਸਾਰਿਆਂ ਨੂੰ ਪ੍ਰਕਾਸ਼ਣ ਵਾਲਾ ਸਾਰੇ ਨੂੰ ਬੰਨ੍ਹਣ ਕਰਵਾਉਣ ਵਾਲਾ ਪਰਮਵਾਦੀ ਆਪ ਹੈ ਗੁਰੂ ਪ੍ਰਸਾਦ ਹੀ ਸਾਰੇ ਹੈ ਅਭਿਆਨ ਦਾ ਆਪ ਕਰਨ ਹੈ ਅਭੇ ਗਿਆਨ ਦਾ ਪ੍ਰਕਾਸ਼ ਕਰਨ ਵਾਲਾ ਗੁਰੂ ਜੀ ਤੁਮ ਸ਼ੀਰੂਪਾਤ ਹੈ ਅਭੇ ਤੋਂ ਪਰੇ ਹੈ ਗੁਰ ਵੱਡੇ ਦਾ ਨਾਮ ਹੈ ਪ੍ਰਸਾਦ ਮੰਗਤ ਵੀ ਨਹੀਂ ਹੈ ਪ੍ਰਸਾਦ ਕਿਰਪਾ ਦਾ ਕਰਨ ਵਾਲਾ ਇਸ ਪ੍ਰਕਾਰ ਸਰਕਾਰਾਂ ਦੇ ਨਿਸ਼ਾਨ ਸਾਰਿਆਂ ਦੇ ਅੰਦਰ ਇਹ ਪਵਾਂ ਦੇ ਦੇ ਅਰਥਾਂ ਨੂੰ ਇਸ ਤਰ੍ਹਾਂ ਵੰਡ ਕਰਕੇ ਕੀਤਾ ਜਾਂਦਾ ਹੈ ਕਿ ਸਰਕਾਰ ਇਹ ਸਾਧਾਰਥੋ ਪਹਿਲਾ ਪਾਵੇ ਯੋਜਨਾ ਕਿੱਥੋਂ ਪੈਦਾ ਹੋਈ ਹੈ ਇਸ ਸਰਕਾਰ ਗੁਰ ਸ਼ਬਦ ਜਿਹੜਾ ਇਹ ਗਰੀ ਤਾਤੂ ਤੋਂ ਪੈਦਾ ਹੋਇਆ ਕੋਸ਼ਿਸ਼ ਨਹੀਂ ਸਾ ਗਰੀ ਤਾਤੂ ਨੂੰ ਨਿਗਲੁੰਦਾ ਕਰੇ ਇਹਦਾ ਗਿਆਨ ਨੂੰ ਨਿਗਲ ਜਾਵੇ ਉਹ ਨੂੰ ਗੁਰੂ ਕਹੀਦਾ ਹੈ ਅਗੇ ਜਨਮ ਬਾਣੀ ਦਾ ਹੈ ਬਾਣੀ ਗੁਰੂ ਗੁਰੂ ਹੋਰ ਬਾਣੀ ਵਿੱਚ ਬਾਣੀ ਅਮਰ ਸਾਰੇ ਤੇ ਜਨਮ ਘੜੀ ਦਾ ਹੈ ਸਭੇ ਲਗਾ ਸਰਗੁਰ ਨਾਨਕ ਜਨ ਦਾ ਆਖੀ ਮੇਰੀ ਅਗੇ ਜਨਮ ਚਲਦਾ ਚਲੂ ਮੂਰਤਨ ਬਹੁ ਪ੍ਰਕਾਸ਼ ਅਮੋਜ ਕਹੀ ਜਾਏ ਇਸ ਪ੍ਰਕਾਰ ਜਨਮ ਪ੍ਰਕਾਸ਼ ਦਾ ਹੈ ਜੋ ਪ੍ਰਕਾਸ਼ ਰੂਪ ਹੈ ਸਾਰਿਆਂ ਦੇ ਅੰਦਰ ਗੁਰ ਬਾਣੀ ਵਰਤੀ ਹੈ ਤਰੀ ਕੀ ਸਭ ਲੋਏ ਇਸ ਤਰਕਾਰ ਦੇ ਵਾਕ ਦੁਆਰਾ ਕਿਸ ਪ੍ਰਕਾਰ ਪ੍ਰਕਾਸ਼ ਕਰਨ ਵਾਲਾ ਹੈ ਕਿ ਧਾਤੂ ਤੋਂ ਕਿੰਨਾਂ ਤੱਕ ਦੂਰ ਇਸ ਪ੍ਰਕਾਰ ਇਹ ਸ਼ੰਕਾ ਕਰਕੇ ਜਿਹੜਾ ਉੱਤਰ ਦੇਣਾ ਹੈ ਇਸੇ ਦਾ ਕੀਤੀ ਕਿ ਮਹਾਰਾਜ ਆਲਿ ਦਾ ਜਿਹੜਾ ਕੋਈ ਨਾਮ ਜਾਣ ਕੀਤਾ ਹੋਇਆ ਇਹ ਕਿੰਨੀਆਂ ਨਾਮਾਂ ਵਾਲਾ ਮੰਤਰ ਹੈ। ਵਾਰਾਗੋ ਜੈਨੇ ਦੇ ਭਾਈ ਸੱਤਨ ਵਾਲਾ ਮੰਦਿਰ ਸੰਤੋ ਸਿੱਤੋ ਇੱਕ ਓ ਅਨਕਾਰ ਸਿਤੋ ਜੋ ਮੰਦਿਰ ਹੈ ਇਹ ਸਭ ਇਹਦੇ ਨਾਮ ਕਿਹੜੇ ਸਤ ਹਨ ਕਰਤਾ ਪੁਰਖ ਇੱਕ ਤੋਂ ਕਰਦਾ ਪੁਰਖ ਨਾਮ ਹੈ ਨਿਰਭਉ ਉਜੈ ਨਿਰਭਉ ਨਾਮ ਹੈ ਨਿਰਵੈਰ ਉਜੈ ਨਿਰਵੈਰ ਨਾਮ ਹੈ ਅਕਾਲ ਮੂਰਤ ਉਜੈ ਅਕਾਲ ਮੂਰਤ ਨਾਮ ਹੈ ਅਜੂਨੀ ਸਤੰਗ ਬੇਕਨ ਅਜੂਨੀ ਹੈ ਸ਼ੇਵਾਂ ਨਾਮ ਵਾਲਾ ਮੰਤਰ ਇਹ ਸਤਨਾ ਨਾਮ ਵਾਲਾ ਮੰਤਰ ਨਾਲ ਸਾਡੇ ਤੋਂ ਗੁਰੂ ਆਪਨਾ ਮੰਤਰੀ ਜਗਦੇ ਮਹਾਰਾਜ ਜਿੰਦੇ ਜਿੱਦੇ ਹੀ ਨਾਮ ਵੀ ਹੈ ਜਿੱਤ ਸਤਿ ਤੇ ਨਾਮ ਬਰਬਾਦ ਕਰੋ ਕੋ ਮਿਰਤ ਹੋ ਮਰਵਾਇਰੋ ਅਕਾਲ ਮੂਰਖ ਜੁਨੀ ਸੈ ਤੁ ਇਸ ਵੀ ਹਨ ਗੁਰੂ ਦੇ ਮਹਾਰਾਜੀ 16 ਨਾਮ ਵੀ ਹੈ ਜਿਵੇਂ ਬਾਜੇ ਜਾਪ ਕਰਦੇ ਹਰੇ ਨਾਮ ਹਰੇ ਰਾਮ ਹਰੇ ਹਰੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਕ੍ਰਿਸ਼ਨ ਕੀ ਹਰੇ ਹਰੇ ਬਾਲਕੰਦੇ ਵਿੱਚ 16 ਨਾਮ ਵੀ ਹਨ ਇਸ ਪ੍ਰਕਾਰ ਈਕ ਓਂਕਾਰਿਕ ਨਾਮ ਹੈ ਅਤੇ ਇਸੇ ਪ੍ਰਕਾਰ ਸਾਰੇ ਨਾਮ ਗਿਣ ਕਰਕੇ ਪ੍ਰਸਾਦ ਕਰਦੇ ਮਾਰਾ ਦੇ 23 ਆ ਗਈ ਲਖੇ ਬਾਕੀ 34 ਨਾਮ ਵਾਲੇ ਕਿੰਨੇ ਹਨ ਇਹਦੇ ਵਿੱਚ 26 ਅੱਖਰ ਹੋਣਗੇ ਇਹਨਾਂ 26 ਅੱਖਰਾਂ ਦੇ ਜੋ ਓਮਕਾਰ ਛੱਡ ਕਰਕੇ ਓਮਕਾਰ ਇਹਨਾਂ ਕਰਾਰੇ 30 ਅੱਖਰਾਂ ਵਾਲਾ ਵੀ ਮੰਤਰ ਹੈ ਤੇ ਬਲਕਿ 26 ਅੱਖਰਾਂ ਵਾਲਾ ਵੀ ਗੁਰੂ ਸਾਹਿਬ ਦਾ ਠੀਕ ਹੈ ਜਿਹੜਾ ਨਾਮ ਲਾਉਂਦੇ ਇਹ ਸ਼ਕਤੀ ਇੱਕ ਪ੍ਰਾਣ ਵਾਲਾ ਵੀ ਮੰਨਤ ਰਖਿਆ ਇਸ ਪ੍ਰਕਾਰ ਇਹ ਦੇਣ ਕਿ ਸਾਰੇ ਹੀ ਮੰਤਰ ਆ ਗਏ ਸਾਰੇ ਮੰਤਰਾਂ ਦਾ ਸਿਵਮਨੀ ਸਿੱਧੋ ਕੋਈ ਸ਼ੰਕਾ ਇਸ ਨੂੰ ਬਾਣ ਮੰਤਰ ਦੁਆਰਾ ਦਿੱਤੇ ਉਹ ਸਾਰੇ ਇਸ ਤਰ੍ਹਾਂ ਕੀਤਾ ਮਹਾਰਾਜ ਲੋਕ ਪ੍ਰਕਾਰ ਦੇ ਯਾਦ ਹੁੰਦੇ ਹਨ ਇੱਕ ਸੱਚੀ ਕਾਸ਼ੀ ਜੋ ਜੋ ਜੀ ਮੂਹਰੇ ਹਨ ਸ਼ੂਬ ਲਖਣ ਵਾਲੇ ਹੁੰਦੇ ਹਨ ਇਕ ਤਕਸੀ ਲਖਣ ਵਾਲੇ ਹੁੰਦੇ ਆਪਨੇ ਇਸ ਕੰਧੇ ਇਹ ਕਿ ਸ਼ੂਬ ਲਖਣ ਤੇਰੇ ਜਿੱਦ ਕੇ ਕਿ ਹਮੇਂ ਉਹ ਹਜੂਰ ਨੇ ਫਰਮਾਇਆ ਹੈ ਕਿ ਤੋ ਇਕੋਂ ਗੌਰ ਕਰਨਾ ਜੇ ਹੈ ਇਹ ਜਿਵੇਂ ਗੋਮਦੇ ਆਏ ਮੇਂ ਪ੍ਰਕਾਰ ਸਾਂ ਸੁਣੀ ਚੂਨੇ ਗਾਜ ਮੰਦਿਰ ਹੋ ਗਏ ਉਹਦੇ ਮੱਧੇ ਦੇ ਜੰਨ ਜੰਨ ਤੋਂ ਅੱਜ ਤੱਕ ਕੀਤੀ ਹੋਈ ਹੋਵੇ ਇੱਕ ਨਹੀਂ ਦੂਜੀ ਜਿੱਤੀ ਕੋਈ ਮੰਦਿਰ ਹੈ ਇਸ ਪ੍ਰਕਾਰ ਜਿਹੜਾ ਉਹ ਸੱਤ ਜੇ ਤਨੇ ਆਦਮ ਦੇ ਨੂੰ ਸਦਾਰੋ ਅਗਵਾਏ ਜੀ ਪਹਿਰੇ ਤੇ ਪ੍ਰਕਾਸ਼ਿਤ ਹੋਆ ਇਹ ਨਹੀਂ ਕਿ ਕਿਸੇ ਖੋਹ ਨਹੀਂ ਗਿਆ ਉਹ ਇਹ ਕਿਰਤ ਹੈ 2000 ਨੂੰ ਜਨੂ ਆਉਂਦੇ ਤੇ ਬਾਫੀ ਲੇ ਪ੍ਰਮੋ ਹੁ ਬਹਿਣੇ ਜਿਹੜੇ ਪਾਉ ਦੇ ਵਿੱਚ ਨਾ ਰਹਿਣੋ ਕਿ ਜਨਾਬ ਇਹਨ ਸਾਰਿਆਂ ਤੋਂ ਵੱਖਰਾ ਇਸੇ ਪ੍ਰਕਾਰ ਹੈ ਜਦੋਂ ਜਨਮ ਦਿੱਤਾ ਹੈ ਉਦੋਂ ਉਹਦਾ ਨਾਮ ਕਰਦਾ ਹੈ ਅਜੇ ਬੁਰਖ ਪੂਰਨਾ ਆਪਣੇ ਕਾਰਜ ਵਿੱਚ ਜਦੋਂ ਇਹ ਜਨਮ ਨਹੀਂ ਕਰ ਕਰ ਲੇਗਾ ਉਦੋਂ ਕਰਦਾ ਉਹਨਾਂ ਦੀ ਉਹਦੇ ਵਿੱਚ ਹੁੰਦਾ ਦੇਰ ਦੇ ਦਿੱਤੇ ਕੰਪੂਲ 30 ਦੇ ਹੋਏਗੇ ਕਦੇ ਮਾ ਹੋਏ ਇਹ ਜਿਹੜਾ ਉਹ ਵਿਆਹ ਤੋਂ ਪਹਿਲੇ ਜਿਵੇਂ ਆਵੇ ਤੇ ਸਦਾ ਮਾ ਹੋ ਸਕਣੇ ਕਿਹਦੇ ਸਹੂਲਤ ਕੰਪੂਲ ਜਿਵੇਂ ਯਾਰਾ ਹੋ ਕੇ ਜਵਾਬੇ ਸਾਰਿਆਂ ਤੋਂ ਉਹਨਾਂ ਦੇ ਵਾਸੀ ਇੱਕ ਤਰੀਕੇ ਬਿਮਾਰਾਂ ਵਿੱਚ ਕਰਦਾ ਦੁੱਖ ਵੇੰਕਰ ਇਹ ਖੱਬਲਾ ਸੁਬਿਲਖਿੰਦੇ ਜਹਤ ਦਿੱਤੋ ਤੇ ਦਸਤੀ ਲਖੋਂ ਕਰਦਾ ਦੁੱਖ ਵੇੰਕਰ ਪਰਮੇਸ਼ਰ ਦੇ ਕਸਮ ਖੀਤੇ ਹੈ ਇਸ ਪ੍ਰਕਾਰ ਮੇਰੇ ਕੋਲ ਨਾ ਖਾਲ ਮੁ ਗਈ ਜੈਤਨ ਗਵੰਦੀ ਜੀ ਕੋਲੋਂ ਮਿਲਦਾ ਹੈ ਇਹ ਸੂਤ ਲੱਗੇ ਤੇ ਬਿਨੋਸੀ ਅੱਖੋਂ ਹੈ ਇਹ ਤਹੁ ਕੀ ਕੇ ਸੁਧਾਵੇਂ ਪਰਸ਼ੁਮਤੀ ਦਾ ਮਹਾਰਾਜ ਜੀ ਕਿ ਇਸੇ ਕਾਂਸ਼ਾ ਆਪਿਰਕਾ ਕਰਕੇ ਦਸੋ ਜੀਵ ਨੂੰ ਅੱਜ ਕੀ ਹੈ ਤਾਂ ਆਪਿਰਕਾ ਕਰਕੇ ਜਾਣ ਕਰ ਰਹੇ ਸਿੱਧੋ ਸੋਹਣ ਕੀ ਕੋਮਕਾਰ ਜੋਖਤਨਾ ਮੰਤਰ ਹੈ ਇਹ ਕੈਸਾ ਨਿਰਵਾਰ ਹੋ ਮਨਰਵਾਰ ਉਹਦੇ ਜੋ ਪ੍ਰਮੇਸ਼ਰ ਅਕਾਲ ਮੂਰਤ ਨੇ ਮਨਰਵਾਰ ਅਜੂਨੀ ਸੈ ਤੁ ਜਿਹੜਾ ਨਿਰਵਾਰ ਅਜੂਨੀ ਜਾਨਵਰ ਤੇ ਪਸ਼ੂ ਤੇ ਪਾਸ਼ੂ ਕੋਈ ਕੋਮਕਾਰ ਮੰਤਰ ਗੁਰਪ੍ਰਸਾਦ ਦੀ ਕਿਰਤਾਂ ਦੇ ਨਾਲ ਇਹਦੇ ਕਰਦਾ ਵਿਰਾਸਤ ਉਹ ਗੁਰੂ ਜੀ ਕਹਿੰਦੇ ਕਿ ਮੰਦਰ ਨਿਰਭਉ ਅਕਾਲ ਮੂਰਤ ਕਰਦਾ ਉਹਨੂੰ ਸਾਰੇ ਦੇਣਾ ਤੋਂ ਰਹਿ ਜਾਂਦਾ ਇਹ ਅਕਾਲ ਰੂਪ ਬਣਾਉਂਦੇ ਇਹ ਫਾਲੇ ਗੁਰੂ ਮੰਤਰ ਦਾ ਕੁਝ 파ਸਾ ਹੈ ਜੇ ਕੋਈ ਯੱਗਦਾ ਹੈ ਉਹਨੇ ਇਸ ਭੰਦੀ ਹੁੰਦੀ ਹੈ ਆਪ ਜੀ ਨੇ ਜਦੋਂ ਇਹ ਸਰ ਸੁਨਾਇਆ ਜਿਹਨਾਂ ਨੇ ਕਰਜੂ ਕੀਤਾ ਕਿ ਜੀ ਬਣਾ ਆਪ ਸੁਤੇ ਇਹ ਸੇਤਰ ਬਾਰੇ ਵਿਆਖੇ ਗੱਬਿਆਤੀ ਤੇ ਗੌਰਵ ਆਲੋਕ ਦੋਸ਼ ਹੁੰਦੇ ਹਨ ਮੰਨਵਾ ਦੇ ਕਿ ਅਲਗ ਨਾ ਮੇਰੀ ਜਿਵੇਂ ਗੁਸ਼ਟਨੀ ਕਮਾਰਾ ਗੋਬਨੇ ਸਾਰੇ ਦੋਸ਼ ਨਹੀਂ ਮਿਲਦੇ ਕਿ ਤੂੰ ਰਹਿ ਤੋ ਇਹ ਜੀ ਬੂਤਾਂ ਤੋਂ ਤੇ ਦੀ ਬਾਤ ਹੈ ਉਹ ਕਹਰੇ ਦੋਸ਼ ਨਹੀਂ ਲੀਬੀ ਮਾ ਲਈ ਅਜੇ ਪਰਖ ਨੂੰ ਕੀਤੇ ਤੁਹਾਰਾ ਇੱਕੋ ਗੋਲ ਫਤਗੈ ਇੰਦ੍ਰੀ ਵੀ ਕੋ ਦਹਾਕਰੂਪਿ ਹੋਇ ਅਗੇ ਇਹ ਗੈ ਫਾਲੇ ਦਾ ਪ੍ਰਕਾਸ਼ ਕੋ ਹੈ ਕੋ ਫੋਕਸ ਕਰੂਪ ਹੈ ਨਾਮ ਕਹਿੰਦੀ ਕੀ ਲੋਲ ਕੀ ਤੁਮਕੇ ਕਰਿਉਂ ਸਾਹਿ ਸਦੋ ਜੇ ਵੀ ਕੇਵਲ ਕੋ ਉਦਾਨੁ ਫਤਗੈ ਇੰਦ੍ਰੀ ਤੁਮ ਆਇ ਕਨ ਕਾ ਅਗਰੂ ਵੀ ਫਤ ਮੰਨਿਆ ਕੋ ਕੋਈ ਜਾਤੀ ਨੂੰ ਸਤ ਮੰਨੇ ਮਨੁੱਖ ਜਾਤੀ ਜਾਤੀ ਵਹਿ ਰਹੀ ਹੈ ਕਿ ਉਹ ਮਰ ਜਾਂਦਾ ਕੋਈ ਰਹਿ ਜਾਂਦਾ ਕਿ ਉਹ ਮਨੁੱਖੀ ਜਾਤੀ ਹੈ ਇਸ ਤਰ੍ਹਾਂ ਨੂੰ ਜਾਤੀ ਨੂੰ ਸਤ ਮੰਨੇ ਆ ਬਾਲ ਜਗ ਜੱਗ ਜਗਾ ਤੋਂ ਮਰਦ ਹੋਇਆ ਹੋਇਆ ਇਹਨੂੰ ਵੀ ਸਤ ਮੰਨੀ ਬੈਠੇ ਹੈ ਜੇ ਕਰਕੇ ਸਿੱਧੀ ਕ੍ਰਿਸ਼ਨਾ ਲੱਖਾਂ ਦਾ ਨੋ ਨੇ ਇਹੋ ਜਿਹੀ ਨ્યાਇਤਾ ਦੀ ਜਾਦੀ ਦਾ ਲੱਛਣ ਹੋ ਜਾਣਾ ਸੀ ਤੇ ਆਵਾਜ਼ ਦਾ ਲੱਛਣ ਹੋ ਜਾਣਾ ਸੀ ਪਰਮੇਸ਼ਰ ਦਾ ਦਖਲ ਦੇ ਕੇ ਪੂਰਾ ਹੋਣਾ ਜੋ ਕਰਕੇ ਜੇ ਜੇਇ ਕੱਟੇ ਨਾ ਮੁਕੀ ਨਾਮ ਵੀ ਸੱਤ ਹੈ ਉਹ ਆਪ ਵੀ ਸੱਤ ਹੈ ਜਿਹੜੇ ਸਾਇਆ ਦੇ ਨਾਮ ਦੇ ਸਾਰੇ ਝੂਠੇ ਹੈ ਪਰਮੇਸ਼ਰ ਦਾ ਨਾਮ ਸੂਤ ਸੱਜਾ ਹੈ ਇਸ ਕਰਕੇ ਇਹ ਲੱਛਣ ਇਸ ਵਿੱਚ ਹੈ ਦੇਵਾਰਾਂ ਨਾਮ ਹੀ ਗਏ ਬੰਦੇ ਇੱਕ ਵਰਤਾਰੇ ਉੱਪਰ ਕਿੰਨੇ ਨਾਲ ਹੀ ਸੱਚਾ ਕਹਿੰਦਾ ਸਿੱਖਾਂ ਨੂੰ ਬ੍ਰਹਮ ਗਿਆਨ ਹੋਇਆ ਕਰਦਾ ਇੱਕੋ ਵਾਰ ਸ਼ਬਦ ਜਿਹੜਾ ਕਰਦਾ ਸਰਸਤਾਂ ਦੀ ਬੋਲਿਆ ਹੈ ਨਾਮ ਤੋਂ ساری ਦੁਨੀਆ ਦੇ ਵਿੱਚ ਉੱਤਰਿਆ ਕਿਰਨਾਂ ਕੋਈ ਨਾਮ ਹੈ ਜਿਹੜਾ ਕੋਈ ਨਾਮ ਹੈ ਕੋਈ ਨਹੀਂ ਨਾਮ ਹੈ ਮੈਂ ਕਮਸਾਰ ਹੈ ਕੋਈ ਕਿਸੇ ਗ੍ਰਾਮੀਣ ਤਰੀਕੇ ਦਾ ਆਖੂਆ ਦੇ ਨਾਮ ਹੋਵੇ ਇਹਨਾਂ ਸਾਰੇ ਨਾਵਾਂ ਦਾ ਲੋਕਾਂ ਨੂੰ ਨਾਮ ਸਮਝ ਲੈਣੀ ਸੀ ਜਿਸ ਕਰਕੇ ਵੀ ਕਰਤਾ ਸ਼ੌਦ ਕੀ ਉਹ ਨਾਮ ਤਾਂ ਦੁਨੀਆ ਦੇ ਨਾਮ ਰੂਪਾਰੇ ਹੀ ਹਨਗੇ ਪਰ ਦਾ ਕਰਤਾ ਕੋਈ ਨਹੀਂ ਰਜਣਾ ਕੋਈ ਨਹੀਂ ਅਸਲ ਵਿੱਚ ਪਰਮੇਸ਼ਵਰ ਹੀ ਹੈ ਜਿਸ ਕਰਕੇ ਵੀ ਕਰਤਾ ਹੈ ਏਵੇਂ ਨਾਲ ਸਿੱਖਾਂ ਨੂੰ ਮਾਰਾ ਗਿਆਨ ਹੋ ਜਾਂਦਾ ਕਿ ਤੁਸੀਂ ਸੁਰਖਸ਼ਵ ਦੀ ਉਹ ਵਰਤਿਆ ਕਿ ਇਹ ਕੁਰਾਨ ਦੇ ਉਪਬਾਤ ਨੇ ਫੁਰਖ ਚੰਗੋ ਇੱਕ ਤਰੀਕੇ ਵੀ ਬਲਿਆ ਹੈ ਕਮਤਾ ਤਾਂ ਜੀ ਬਸਰ ਦਾ ਗੁਨਾਹ ਹੈ ਅਦੇ ਘੜੇ ਦਾ ਤੁਹਿਆਰ ਹੈ ਕਿਉਂ ਕਰਦੇ ਬਣ ਜਾਵੇ ਅਸੀਂ ਲੋਕਾਂ ਦੇ ਵਿੱਚ ਜਿਹੜੀ ਚੀਜ਼ ਸੀ ਉਹਨੋਂ ਤੇ ਨਿਗਾਹ ਸਾਰਿਆਂ ਦੀ ਆ ਜਾਣੀ ਸੀ ਪਰ ਉਹ ਫੁਰਖ ਨਹੀਂ ਹਨ ਤੁਹਿਆਰ ਖੜੀ ਤੋਂ ਵੱਖਰਾ ਹੈ ਅਦੇ ਗੁਨਾਹ ਆਪੇ ਤੋਂ ਵੱਖਰਾ ਹੈ ਉਹ ਆਪਣੇ ਕਾਰਜ ਵਿੱਚ ਆਪ ਸਮਾਇਆ ਆਪ ਦੇ ਕਾਰਜ ਦੀ ਆਪ ਮਿਲਿਆ ਹੋਇਆ ਇਸ ਸੰਸਾਰ ਦੇ ਅੰਦਰ ਆਪ ਜੀ ਜਨਾਬ ਮੁਲਾਸ ਕਰ ਰਿਹਾ ਹੈ ਕਿਸ ਕਰਕੇ ਕੰਤਾਪੁਰ ਹੁਕੀ ਖਾ। ਇੰਨੇ ਨਾਲ ਹੀ ਸਿੱਖਾਨੂੰ ਗਿਆਨ ਹੋ ਗਿਆ ਕਰਦਾ ਕਰਦੇ ਬੇਨਿਲਕੋਸ਼ਾ ਉਸੇ ਕੀ ਉਹ ਤਾਂ ਸਰਬੂਜੀ ਜੀ ਨੇ ਜਗਨ ਭਾਈ ਇਹ ਕੋ ਜਿਹੜਾ ਸੀ ਇਹ ਕੋਈ ਅੰਦਾ ਪਰ ਕਹਿਣ ਦੇ ਸਾਖੀਆਂ ਦਾ ਕੁਝ ਨੁਸਰਾ ਹੈ। ਸਾਂਖੇਰਾਂ ਫੰਡੋ ਹਮ ਮੁੱਖਾ ਇਸੇ ਵੀ ਦਾਰਾ ਹੀ ਨਹੀਂ ਮੰਨਿਆ ਕਿ ਸੰਗ ਹੈ પુરੁਖ ਕੋ ਕਦੀ ਤੱਕ ਵਾਪੀ ਹੈ ਸੰਗੇ ਗਿਆਨੰਦਰੇ ਸੰਗੇ ਜਾਨੰਦਰੇ ਤੂੰ ਤੱਕੋ ਇਸ ਤੂੰ ਤੱਕੋ ਕਿ ਅਜਿਹੀ ਹੈ ਜੇ ਤੇ ਪ੍ਰਕਾਰ ਇਹਨਾਂ ਚੀਜ਼ਾਂ ਨੂੰ ਰਹਾ ਕਰਕੇ ਕਦੀ ਤੱਕ ਮੰਨਦੇ ਤੇ ਵੱਡੀਆਂ પુરੁਖ ਨੂੰ ਮੰਨਦੇ ਹੈ પુરੁਖ ਇਹ ਹੈ ਉਹਦੇ ਤਾਈ ਕਿਸ ਦਾ ਵਰਦਾ ਦੇ ਜਿਹਦਾ ਕਾਰਜ ਨਹੀਂ ਉਹ ਮੰਨਦੇ ਜੇਕਰ ਕੇ ਉਹੁਰਖ ਸਾਖੀਆਂ ਦਾ ਆ ਜਾਣਾ ਸੀ ਤੇ ਅਸੀਂ ਮਿਰਭੌਉ ਸ਼ਬਦ ਦਾ ਕਿਹਾ ਕਿ ਉਹ ਮਿਰਭੌਉ ਨਹੀਂ ਹੈ ਇਹ ਤੁਹਾਨੂੰ ਕਿ ਕਾਲ ਉਸ ਸ੍ਰਿਸ਼ਟੀ ਨੂੰ ਖੰਡਣ ਕਰਦਾ ਹੈ ਉਹ ਸਾਕੀਆਂ ਵੀ ਜੀਉਂਦੀਆਂ ਜੇ ਉਹ ਜੰਮ ਕਰੂਗੀ ਉਹ ਖੰਡਾ ਉਹ ਹੋਰੀਆਂ ਚੀਕਾ ਨਿਕਲ ਜਾਂਦੀਆਂ ਸਾਖੀਆਂ ਦੇ ਮੂਖੀਆਂ ਇਸ ਕਰਕੇ ਉਹ ਮਿਰਭੌਉ ਨਹੀਂ ਹੋ ਸਕਦਾ ਅਸੀਂ ਮਿਰਭੌਉ ਦਾ ਦਾਅਵਾ ਕਰਦਾ ਹੈ ਕਿ ਸਾਖੀਆਂ ਦੇ ਬੁਰਖ ਜਿਹੜਾ ਹੈ ਮਨਿਓਆ ਅਪੀ ਅੰਨ ਕੀ ਅਵਿਗਤ ਗੋ ਉਹ ਹੀ ਮੈਂ ਲੋਕ ਮੰਨ ਲੈ ਪ੍ਰਮੇਸ਼ਰ ਨਹੀਂ ਕੋ ਉਸ ਕਰਕੇ ਆਪ ਨੂੰ ਮੇਂ ਬਾਸ਼ਾ ਬੇਕਈ ਫਿਕਰ ਕੇ ਮਾਰਨ ਕੇ ਤਾਈ ਨਿਰਭਉ ਦਾ ਰਾਵਣ ਵਰਕੇ ਹਰਨਾਕ ਦੇ ਲਈ ਅਨੰਦ ਬਣੇ ਬੈਠੇ ਜੀ ਕਹਿੰਦੇ ਵੀ ਹਰਨਾਕ ਜਲੇ ਰਹਾ ਮਾ ਹਰਨਾਕ ਮੈਂ ਸਭੁ ਬੁਨਾ ਮੇਰੇ ਬਿਨਾ ਹੋਤ ਕੋਈ ਨੀ ਉਹ ਵੀ ਨਿਪੋਟੀ ਜੇ ਇਹੇ ਸੰਦੇਹੇ ਕਿੰਨੀ ਖੈਨਾ ਜੀ ਜੇ ਨਾ ਬੂਦੇ ਮੁਖਰੇ ਬਾਹਰ ਤੋਂ ਕਹਿਣਾ ਜਿਦ ਹੀ ਹੈ ਜੇਰੇ ਆਪੋ ਤੇ ਸਮੁੰਦਰ ਚ ਡੁੱਬਦੇ ਨਹੀਂ ਜੇ ਇਹੇ ਅਕਰ ਵਾਲੇ ਸਮੇਂ ਉਹ ਇਸ ਪ੍ਰਕਾਰ ਨਹੀਂ ਬਹੁਤ ਜਾਣੀ ਅਵੰਨਰਾਇਣ ਨਹੀਂ ਜੇ ਕਰਕੇ ਫਿਰ ਵਾਹਿਗੁਰੂ ਰਖਣ ਕਰਨਾ ਸੀ ਬਰ ਮੇਰੇ ਜਿੰਨੀ ਪਾਗਵੀ ਹੈ ਜਿੱਥੇ ਉਹ ਮੇਰਾ ਐਰਮੀ ਹੈ ਉਹ ਦਾ ਕਿਸੇ ਨਾਲ ਐਰਮੀ ਫਿਰ ਮਾਰਾ ਇਹ ਨਹੀਂ ਕਹਿਣਗੇ ਜਿਵੇਂ ਐਰ ਰਹੋ ਅਕਾਲ ਮੂਰਤ ਤੇ ਇੰਝ ਆਖੋ ਤਾਂ ਸਰਮੀ ਮਾਰਾ ਸਾਡੀ ਕਹਿਣ ਲੱਗੇ ਭਾਈ ਇਸ ਕਰਕੇ ਅਕਾਲ ਅਸੀਂ ਬੰਦ ਕੇ ਹੈ ਜਿਹੜੇ ਸਤ ਮਹਾਜਮਾ ਕੋ ਕਿਸੇ ਨਾਲ ਐਰਮੀ ਕਰਦੇ ਜਿਹੜੇ ਐਰ ਉਹ ਵੀ ਹੈ ਕਹਿੰਦੇ ਉਹ ਵੀ ਦੇ ਦਾ ਕਾਲ ਮੇਰੀ ਹੈ ਕਾਲ ਉਹ ਮੇਰੀ ਬੇਨੂਲਾਕ ਕਰ ਦਿੰਦਾ ਦੇਸ ਕਰਕੇ ਆਕਾਲ ਚਲ ਰਿਹਾ ਹੈ ਕਿ ਕੋਈ ਕੰਪੂਨਰ ਵਾਇਰ ਦਾ ਹਨਗੇ ਪਰ ਆਕਾਲ ਨਹੀਂ ਹੋ ਉਹ ਆਕਾਲ ਸ੍ਰੂਪ ਹੈ ਇਹ ਮਾਰਾ ਇਹਨੇ ਜੀ ਨੂੰ ਚਿਰ ਕਰਦੇ ਆਕਾਲ ਕਹਿੰਦੇ ਮੂਰਤ ਜਿੰਦੇ ਹਾਂ ਕਹਿੰਦੇ ਮੰਨਿਆ ਹੋ ਲੋਕਾਂ ਨੇ ਜਦੋਂ ਖੜਾ ਨਾ ਹੋ ਜਾਵੇ ਉਹ ਕਿਤੇ ਟਿਕਰੀਆਂ ਹੋ ਜਾਵੇ ਉਸ ਸਮੇਂ ਨੂੰ ਇਸ ਪ੍ਰਜੂਸਤਾ ਬਾਹੂ ਕਹਿੰਦੇ ਆ ਘਰੀ ਦਾ ਨਿਰ ਜਾਣਾ ਕੁੱਟ ਜਾਣਾ ਫੁੱਟ ਜਾਣਾ ਇਸ ਪ੍ਰਕਾਰ ਫੀਰਾਂ ਦੇ ਅੰਤ ਹੋ ਜਾਣ ਦਾ ਨਾ ਪ੍ਰਜੂਸਤਾ ਬਾਹੂ ਜੋ ਕਹਿੰਦੇ ਨੇ ਇਸ ਗਰਦਾਰੋ ਅਕਾਲ ਪ੍ਰਜੂਸਤਾ ਵੀ ਜਿਹੜਾ ਇਹ ਹੈ ਉਹ ਬਣੀ ਰਹਿੰਦਾ ਹਮੇਸ਼ਾ ਲਈ ਇਸ ਵੇਲੇ ਪ੍ਰਜੂਸਤਾ ਬਾਹੂ ਨੂੰ ਨੇ ਅਕਾਲ ਮੰਨ ਲਿਆ ਸੀ ਇਸ ਕਰਕੇ ਅਸੀਂ અમૂર્ત કિસામે ਦੱਸਦਾ ਹੈ ਕਿ ਆਕਰ ਦੇ શીਕੇ ਨਾ ਉਹ ਨੂੰ અમૂર્ਤ ਸ਼ਬਦ ਕਰਕੇ ਵਰਤਉਂਦਾ ਹੈ। ਉਹ ਪ੍ਰਗੁਣਵਾਤ ਹੋਣ ਤੇ ਘੜੇ ਨੇ ਜੋੜ ਕੇ ਜਿਹੜੇ ਨੌਰ ਇਕੱਠੇ ਨਾ ਕੀਤੇ ਭਾਵ ਕਹਿੰਦੇ ਹਨ। ਇਸ ਪ੍ਰਕਾਰ ਉਹਨਾਂ ਲੋਕਾਂ ਨੇ ਇਸ ਪ੍ਰਕਾਰ ਆਕਾਲ ਚਰਖ ਵੀ ਕਾਇਆ ਆਕਾਲ ਸਮੇਂ ਜਦੋਂ ਇਹ ਘਰਾ ਨਹੀਂ ਬਣਿਆ ਉਹਨੇ ਖਾਲਾ ਬਣਿਆ ਜਦੋਂ ਸੁਖੂਟਾਪੀ ਬਣੇ ਸੁਖੂਣ ਨਹੀਂ ਬਣੇ ਉਸ ਵੇਲੇ ਨੂੰ ਆਕਾਲ ਲੈਣਾ ਸੀ ਉਹ ਅਮੂਲ ਕਮੀਸ਼ ਸੀ ਇਸ ਕਰਕੇ ਅਸੀਂ ਮੂਲ ਦੇ ਸ਼ਬਦ ਦੱਸਦਾ ਕਿ ਮਹਾਰਾਯਾ ਆਕਾਲ ਮੂਲ ਤੋਂ ਕਹਿੰਦੇ ਵੀ ਉਹ ਆਕਾਲ ਸਰੂਪ ਹੈ ਅਜੂਨੀ ਬਹਿਨ ਦੀ ਕੀ ਲੋੜ ਸੀ ਸਾਹ ਹਜੂਰ ਨੇ ਕਹੇ ਭਾਈ ਮੂਰਤੀ ਮੰਨਦਾ ਪਰ ਮਾਣੂ ਵੀ ਹਨਗੇ ਜਿਹੜੇ ਪਰਵਾਣੂ ਹੈ ਮੂਰਤੀ ਆਏ ਹਨ ਭਾਵੇਂ ਜੋ ਵੀ ਧਿਆਨ ਨਾਲ ਦੇਖਦੇ ਹੈ ਮੂਰਤ ਨੂੰ ਵੀ ਮੂਤ ਪ੍ਰਕਾਸ਼ ਨਹੀਂ ਦੇਖੀ ਜੋ ਵੀ ਧਿਆਨ ਨਾਲ ਦੇਖਦੇ ਹੈ ਅੱਗੇ ਉਹ ਜਿਹੜੇ ਆਏ ਅਜੂਨੀ ਵੀ ਹਨਗੇ ਇਹ ਕਰਕੇ ਲੱਖਾਂ ਬ੍ਰਹਮਾਂ ਦਾ ਕੀ ਕੀਤਾ ਹੈ ਇਹ ਬ੍ਰਹਮ ਹੈ ਉਹ ਜਨਮ ਹੈ ਉਹ ਜਿਹੜਾ ਨੇ ਪਰਮਾਣੂ ਉਹ ذੁਮਕਾ ਜੁਰ ਕੇ جوڑ کے ذੁਮਕਾ ਇਹ ਜਿਹੜੇ ਉਹਦੇ ਕਰਕੇ ਬਣ ਜਾਂਦੇ ਉਹ ਸ੍ਰਿਸ਼ਟੀ ਨੂੰ ਕਾਇਦਾ ਕਰਦੇ ਪਰਮਾਣੂਆਂ ਦੇਾਰੇ ਨਿਆਂਇਕਾਂ ਉਹਦਾ ਲਖਣ ਹੋ ਜਾਣਾ ਕਰਨਾ ਵੀ ਪਰਮੇਸ਼ਰ ਦਾ ਇਹ ਕਰਕੇ ਮੂਰਤੀਆਂ اور ਅਜੂਨੀ ਬਾਤ ਲੱਗਦਾ ਹੈ ਕਿ ਉਹ ਮੂਰਤੀਆਂ ਇਸ ਪ੍ਰਕਾਰ ਦੇ ਜਿਹਨੇ ਪਰਮਾਣੂ ਹੈ ਉਹ ਮੂਰਤੀ ਦਿੱਲੀ ਦਾ ਹੈ ਨਹੀਂ ਉਹਨਾਂ ਦੀ ਦਰभी annals ਜੋਗੀ ਵੇਖਦੇ ਆ ਉਹ ਪ੍ਰਮਾਣੂ ਆਗੇ ਤਾਂ ਹੀ ਉਹ ਮੂਰਤੀ ਵਾਲਾ ਜਿੰਕਾ ਜਿੰਕਾ ਜੀਤੇ ਕਹਿਣਾ ਕਰਨ ਵਾਲੇ ਉਹ ਅਜੂਨੀ ਅਜੰਮੇ ਕੇ ਜੁਕਾ ਆ ਕੀਤਾ ਹੈ ਅਜੂਨੀ ਸ਼ੋਪਾ ਮਾਰਾ ਦੇਸਾ ਇਹਨਾਂ ਨਾਲ ਹੀ ਸਿੱਖ ਨਿਹਾਲ ਹੋ ਗਿਆ ਕਰਦੇ ਫਿਰ ਸੇਖੋਂ ਕਹਿਣ ਦੀ ਕੀ ਲੋੜ ਕਿਉਂਕਿ ਗੁਰੂ ਮਾਰੇ ਸਾਹਮਣੇ ਬੱਦੀ ਚੀਤੇ ਰਿਹਾ ਹੀ ਉਜਨੀ ਤਾਂ ਮਾਇਆ ਨੂੰ ਵੀ ਲੋਕਾਂ ਨੂੰ ਮੰਨਿਆ ਜਿਹੜੀ ਮਾਇਆ ਹੈ ਕਹਿੰਦੇ ਕਿ ਕੋਈ ਜਿੰਮੀ ਨਹੀਂ ਹੈ ਪਹਿਲਾਂ ਨਹੀਂ ਹੋਈ ਅੱਜ ਵੀ ਨਹੀਂ ਹੁੰਦੀ ਕਿੱਥੋਂ ਆਈ ਹੈ ਦੇਸ ਦੁਗਾਰ ਜੁਨਾ ਤੋਂ ਬਾਅਦ ਮਾਇਆ ਪਰ ਉਹ ਕਦੇ ਪ੍ਰਕਾਸ਼ ਪ੍ਰਕਾਸ਼ ਨਹੀਂ ਅਕਿ ਸਹਿਤ ਸ਼ਬਦ ਦੇ ਨਾਲ ਸੁਭੇ ਪ੍ਰਕਾਸ਼ ਨੂੰ ਬ੍ਰਹਮ ਦਾ ਲਖਣ ਕਹਿੰਦਾ ਹੈ ਦੇਸ ਕਰਕੇ ਸਹਿਤ ਵੀ ਸ਼ਬਦੋ ਵੀ ਹੈ ਜੇ ਉਹਾਰੇ ਇਹ ਨਹੀਂ ਕਹਿੰਗੇ ਜੁਨੀ ਸਹਿਤ ਨੂੰ ਉਹ ਅੱਗੇ ਵਰ ਸ਼ਬਦ ਕਹਿੰਦੀ ਕੀ ਗੋੜ ਸੀ ਸਹ ਹਜੂਰ ਨੇ ਕਹੇ ਭਾਈ ਸਭ ਨੂੰ ਸੋਦੇ ਪ੍ਰਕਾਸ਼ ਦਾ ਲੋਕਨ ਖੱਡ ਜੋਤੀਆਂ ਨੂੰ ਵੀ ਮੰਨਿਆ ਜਾਂ ਮਸੂਰ ਯਾਰ ਕੋ ਰੋਸ਼ਨੀ ਕਰਦੇ ਆ ਬਿਨਾ ਬੀਵੇ ਕਰੀ ਜਾਂਦੇ ਆ ਵੀ ਸੋਦੇ ਪ੍ਰਕਾਸ਼ ਕਰਕੇ ਮੰਨਿਆ ਇਸ ਕਰਕੇ ਇਹ ਗੁਰੂ ਨੇ ਵਰਤਿਆ ਇਹ ਗੁਰੂ ਜੇਤਨੀ ਹੈ ਕੋਹੋਂ ਨਹੀਂ ਕੋਈ ਗੁਰੂ ਸਰਪਾ ਕੇੰਦਰੇ ਕੋ ਇੱਕ ਦਾਉਣੀ ਦੀ ਕੁบุรี ਕੋਹਉ ਵਿਚਾਰ ਹੈ ਇਹ ਜਿਸ ਵਤਨ ਕਿਆ ਕੇ ਨਹੀਂ ਬੰਦੇ ਅਗੇ ਤੋਹਾਵ ਕਹਿਣ ਦੀ ਨੇ ਉਦੋਂ ਤੱਕ ਕਿ ਦੋ ਗੁਰਦੋਂ ਵੱਡੇ ਦਾ ਨਾਮ ਹੈ ਸਵੇਰ ਪਰ ਗੁਰ ਅਕਾਸ਼ ਨੂੰ ਮੰਨਦੇ ਆ ਇਸੇ ਪ੍ਰਕਾਰ ਹੋਰ ਚੀਜ਼ਾਂ ਦੁਨੀਆ ਵੱਡੀਆਂ ਲੋਕਾਂ ਨੇ ਮੰਨੀ ਉਹਨਾਂ ਨੂੰ ਗੁਰੋ ਕਹਿ ਜਾਂਦੇ ਬਲੋ ਪ੍ਰਸਾਦ ਨੰਦ ਨੂੰ ਉੱਨੀ ਵਟੀਆਂ ਭਾਵੇਂ ਕੀਤੇ ਆ ਹਨ। ਅਨੰਦ ਰੂਪ ਪ੍ਰਸਾਦ ਦਾ ਕੇ ਜਪ ਸ਼ਬਦ ਕੀ ਇੰਕਿਹਾ ਇਹ ਜੇ ਪ੍ਰਸਾਦ ਤੋਂ ਵਿਸ਼ੇ ਦੇ ਰੂਪ ਹੀ ਲੋਕਾਂ ਨੂੰ ਵਿਸ਼ੇ ਨੂੰ ਉਹ ਪਾਪੀ ਬਣਾਉਣ ਵਾਲਾ ਹੈ। ਕਿਉਂ ਪ੍ਰਸਾਦ ਸੱਤ ਨਹੀਂ ਹੈ? ਇਹ ਉਹ ਸੱਤ ਸਮੂਹ ਹੋਏਗਾ। ਐਸਾ ਬ੍ਰਹਮ ਦਾ ਸੰਖਰੂਪੀ ਦਾ ਕਿ ਉਹ ਸਾਰੇ ਲਖਣੂ ਸਾਹਿਬ ਜੀ ਨੂੰ ਅਪੀ ਬਿਆਪੀ ਅਪੀ ਬਿਆਪੀ ਦੋਸ਼ ਅਪੀ ਬਿਆਪੀ ਤੇ ਗਵਰਤਨ ਦੋਸ਼ ਕੇ ਨੇ ਦਾ ਲਖਣ ਪੂਰਨ ਕੀਤਾ ਤੇ ਪਾਤਸ਼ਾਹ ਜੀ ਉਚਾਰਨ ਕੀਤਾ ਇੱਕ ਵਾਰ ਸ਼ੁਣ ਕੀਤਾ ਮਾਲਾ ਚਾਰ ਅਨਵੰਦ ਹੁੰਦੇ ਆ ਉਸ ਤੋਂ ਅੰਦਰ ਉਹ ਅਨਵੰਦ ਵੀ ਕੀਤਾ ਕਰੇ ਜਸਵਤਨ ਨੂੰ ਤਾਂ ਸੁਣ ਕੇ ਮਾਲਾ ਜੀਵੋ ਜੋਗੇ ਦੇ ਅਗੰਗੋਸ਼ ਦੇ ਨੂੰ ਜਿਹਨਾਂ ਨੇ ਕਿਹਾ ਸੱਚੇ ਪਾਪਾ ਜੀ ਬ੍ਰਾਂਟਨ ਦੇ ਨਾ ਸੂਰਤ ਹੋਏ ਨਾ ਪਰ ਇਹ ਸੂਰਤ ਮੰਨਤਾ ਜਿਹੜੇ ਅੰਗੰਦੇ ਨੂੰ ਨਾ ਪਿਛਾਣੇ ਕਿਦਰਾ ਆਦਮੀ ਇਸ ਬਾਰੇ ਕਿ ਪਰ ਵੀ ਹੁੰਦਾ ਇੱਕ ਦਾ ਅਧਿਕਾਰੀ ਕੌਣ ਹੁੰਦਾ ਹੈ ਤੇ ਦੂਸਰਾ ਵਿਸ਼ੇ ਕੀ ਚੀਜ਼ ਸਿਧਾਂਤ ਕੀ ਹੁੰਦਾ ਹੈ ਅਬੇ ਜੀਆ ਪਰਜੋਗ ਮੁਸਫੀ ਕੀ ਕੀ ਹੁੰਦੀ ਹੈ ਤੇ ਕਿੰਨਾ ਬੰਧ ਕੀ ਆ ਉਹਨੂੰ ਨਿਰੰਤਰ ਜਿੰਨਾ ਉਹਦੀ ਗੁੰਝੁਮ ਕੀ ਬਣਿਆ ਹੋਵੇ ਜਿਵੇਂ ਜਿਮਾ ਸ੍ਰੀ ਗੁਰੂ ਵਿਅੰਕਾਲ ਜੀ ਨੇ ਕਿਹੜਾ ਨੰਦ ਕੀ ਹਨ ਕਿ ਸਾਹਿਬ ਸਿੱਖੀ ਦਾ ਪ੍ਰਚਾਰ ਕਰਦੇ ਹੋਏ ਆਪ